ਜੋ ਲੋਕ ਮਹੱਲਾ ਪਹਿਲਾ ਗਿਆਨ ਵਿਹੂਣਾ ਗਾਵੇ ਗੀਤ ਭੁਖੇ ਮੁੱਲਾਂ ਘਰੇ ਮਸੀਤ ਮਖੱਟੂ ਹੋਏ ਕੇ ਕੰਨ ਪੜਾਏ ਫਕਰ ਕਰੇ ਹੋਰ ਜਾਤ ਗਵਾਏ ਗਿਆਨ ਵਿਹੂਣਾ ਗਾਵੇ ਗੀਤ ਜਿਹੜੇ ਗੀਤਾਂ ਰਹਿਨੇ ਧਰਮ ਦੇ ਜਿਹੜੂਲ ਪਤਾ ਨਹੀਂ ਵੀ ਗੀਤ ਦਾ ਅਰਥ ਕੀ ਹੈ ਅਸਲ ਗੱਲ ਕੀ ਹੈ ਗੀਤ ਵਿੱਚ ਕਿਹਾ ਹੋਇਆ ਕੀ ਹੈ ਸਭ ਜੈ ਜੀ ਗਾ ਰਹੇ ਇਹ ਸਭ ਜੈ ਜੀ ਉਹਨਾਂ ਦੇ ਅੰਦਰ ਸੁਧਾਰ ਵੀ ਹੋਣਾ ਹੋਵੇ ਗੀਤ ਆਪਣੇ ਅੰਦਰ ਵੀ ਸੁਧਾਰਦੀਆਂ ਸਭ ਦਾ ਗਿਆਨ ਵੀ ਹੋਣਾ ਗੀਤ ਸਾਡੇ ਪ੍ਰਚਾਰ ਜਿਹੜੇ ਨਿਰਾਗੀ ਵੀ ਗੀਤ ਗਾਉਂਦੇ ਨੇ ਗਿਆਨ ਹੈ ਜੀ ਇਹਨਾਂ ਨੂੰ ਪਤਾ ਕੁਰਬਾਨੀ ਕੀ ਕਹਿੰਦੀ ਹੈ ਬਹੁਤੀ ਕੁਰਬਾਨੀ ਦਾ ਉਹਨਾਂ ਨੂੰ ਗਿਆਨ ਨਹੀਂ ਕੀ ਕਹਿੰਦੀ ਗੀਤ ਗਾਉਂਦੇ ਨੇ ਖਾਲੇ ਖਾਤੇ ਗਾਉਂਦੇ ਨੇ ਭੁੱਖੇ ਪਲਾ ਘਰੇ ਮਸੀਤ ਢਿੱਡ ਦੀ ਭੁੱਖ ਨੇ ਰੋਟੀਆਂ ਕਾਰਨ ਪੂਰੇ ਸਾਲ ਘਰੇ ਮਸਜਿਦ ਬਣਾ ਲਈ ਪਾਤਰ ਖਾਈ ਜਾਂਦਾ ਜੀ ਇਹਤ ਲੋਕਾਂ ਨੂੰ ਸੁਣਾਈ ਜਾਂਦਾ ਹੈ ਚੋਲਾਵਾ ਆਈ ਜਾਂਦਾ ਖਾਈ ਕੀ ਬਾਬਨ ਆਪਣਾ ਘਰੇ ਮਸਜਿਦ ਬਣਾ ਲਿਆ ਗੌਣ ਖਾਤਰ ਮਸਜਿਦ ਚਿੱਟੀ ਗੌਣ ਦੇ ਤੇ ਹੈਗੇ ਦਿੰਦੇ ਨੇ ਜੇਕਰ ਗਵਰਨਰ ਤਾਂ ਆਪਣੇ ਗੱਲ ਹੋਰ ਜ਼ਿਆਦਾ ਖਵਾਲੀ ਅੱਛਾ ਜੀ ਇਹ ਸਾਂਝੀ ਗੱਲ ਹੈ ਆਪਣੇ ਵੀ ਜਿਹੜੇ ਗੁਰਬਾਣੀ ਪੜ੍ਹਦੇ ਆਂ ਗਿਆਨ ਨਹੀਂ ਹੈ ਉਹ ਫਿਰ ਬ੍ਰਹਮ ਗਿਆਨ ਨੂੰ ਛੱਡ ਕੇ ਗੀਤੇ ਗਾ ਰਹੇ ਆਂ ਜੀ। ਜਦੋਂ ਉਹਨਾਂ ਨੂੰ ਸੁਧੀਆਂ ਜੜੀ ਹੈਗੀ ਤਾਂ ਫਿਰ ਗੀਤ ਇਹਦੇ ਹੋਰ ਪੀ ਆਂ। ਠੀਕ ਹੈ। ਜੇ ਗੀਤ ਨਾਲ ਉਹਨਾਂ ਖੁਦ ਵੀ ਤਬਦੀਲੀ ਆਵੇ ਪਹਿਲਾਂ। ਹਾਂ कोई गावे रागी ਨਾਦੀ ਬੀ ਬਹੁ ਭਾਂਤ ਕਰ ਉਹਨਾਂ ਨੂੰ ਉਹ ਗੱਲ ਸਮਝ ਆ ਜਾਣੀ ਚਾਹੀਦੀ ਹੈ ਜੀ ਹਾਂ ਜੀ ਮਖੱਟੂ ਹੋਏ ਕੇ ਕੰਨ ਬੜਾਏ ਫਕਰ ਕਰੇ ਹੋਰ ਜਾਤ ਗਵਾਏ ਕਬ ਨਾ ਕਰਨਾ ਭਾਵੇਂ ਨਾ ਕੰਮ ਕਰੇ ਤੀ ਰੋਟੀ ਮਿਲੀ ਜਾਵੇ ਕੰਨ ਤਾਂ ਤਾਂ ਪੜਾਏ ਸੀ ਵੀ ਬਿਨਾਂ ਔਰ ਜਾਤ ਗਵਾਏ ਹੋ ਲੋਕਾਂ ਨੂੰ ਗਵਾਇਆ ਤੂੰ ਗਿਜਾ ਲੈਣ ਜਾਂ ਕੰਨ ਬਾੜ ਤੇ ਦਾ ਸਰੀਰ ਤਾਂ ਗਵਾਇਆ ਗਿਆ ਨਾ ਤੇ ਤਾਂ ਸਰੀਰ ਲਾ ਗਿਆ ਨਾ ਨਾਲ ਗਿਆ ਤਾਂ ਕਰੇ ਫਕਰ ਕਰੇ ਫਕਰ ਕਰ ਦਿੰਦਾ ਦੂਜੇ ਨੂੰ ਵੀ ਫਕੀਰ ਬਣਾ ਦਿੰਦਾ ਸਰੀਰ ਦੀ ਜਾਤ ਤੇ ਨਿਸ਼ਾਨੀ ਲਾਤੀ ਨਾ ਆਪਣੀ ਹਾਂਜੀ ਹੋਰ ਜਾਤ ਗਵਾਏ ਇੱਕ ਹੋਰ ਸਰੀਰ ਬਗਾੜਦਾ ਗੁਰ ਪੀਰ ਸਦਾਏ ਮੰਗਣ ਜਾਏ ਤਾਂ ਮੂਲ ਨਾ ਲਗੀਆਂ ਪਾਈ ਕੋਈ ਫੇਮ ਹੀ ਕਹੂ ਨਾ ਅਗਰ ਬੁੱਤਨ ਲੋਕਾਂ ਦੇ ਘਰ ਜਾਂਦਾ ਉਹਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਉਹਦੀ ਗੱਲ ਨਹੀਂ ਕਰਨੀ ਚਾਹੀਦੀ ਉਹ ਫਰੌਦੀ ਆ ਸੰਤ ਸਾਰੇ ਫਰੌਦੀ ਨੇ ਸੰਤਾਂ ਦੇ ਲੱਗਦਾ ਉਹ ਬਰਮ ਗਿਆਨੀ ਕਹੋਂ ਰਹੇ ਨੇ ਤਰੇ ਫਰਦਰ ਕੁੱਤੇ ਆਵਾਂ ਤੁ ਜੋ ਵਰਤੀ ਲੱਭਦੇ ਫਿਰਦੇ ਨੇ ਘਰਾਂਗੇ ਉਹ ਬਰਮ ਗਿਆਨੀ ਤਾਂ ਆਪ ਪਰਮੇਸ਼ਰ ਹੈ ਪਰਮ ਗਿਆਨੀ ਦੀ ਅਸਪੜਿਤਾ ਪੜੋ ਪਰਮ ਗਿਆਨੀ ਦਾ ਸਰੂਪ ਇਸ ਕਰਤਾ ਹੈ ਪਰਮ ਗਿਆਨੀ ਸਾਜੀ ਵੇ ਦੇ ਘਰ ਘਰ ਪਰਮ ਗਿਆਨੀ ਠੀਕ ਹੈ ਜੀ ਪਰਮ ਗਿਆਨੀ ਤਾਂ ਹੈ ਜੇ ਬ੍ਰਹਮ ਗਿਆਨੀ ਨਹੀਂ ਹੰਦਾ ਪਰਮ ਗਿਆਨੀ ਤਾਂ ਸਾਰੇ ਹੀ ਨੇ ਠੀਕ ਹੈ ਜੀ ਵੀ ਜਿਹੜੇ ਆਪਣੇ ਆਪ ਨੂੰ ਗੁਰਪੀਰ ਸਦਾਉਂਦੇ ਐ ਔਰ ਮੰਗਣ ਜਾਂਦੇ ਐ ਉਹਨਾਂ ਨੂੰ ਭਰੋਸਾ ਨਹੀਂ ਹੈਗਾ ਕਿ ਪਰਮੇਸ਼ਰ ਦੇਊਗਾ ਉਸ ਦਾ ਗੁਰਪੀਰ ਉਹ ਗੁਰਪੀਰ ਤਾਂ ਦੱਦੇ ਹੁੰਦੇ ਨੇ ਕੋਸ਼ ਉਹ ਕੱਢ ਦੋ ਜਿਹਾ ਦੱਦੇ ਨੇ ਜਾਂ ਗੁਰਪੀਰ ਦਾ ਸਮਝੋ ਆਪਣੇ ਆਪ ਨੂੰ ਸੰਤੋਖੀ ਤਾਂ ਹੁੰਦੇ ਹੁੰਦੇ ਨੇ ਚਲੋ ਜੇ ਦੇ ਦੀ ਧਰ ਕੇ ਕੋਸ਼ ਸੰਤੋਖ ਤਾਂ ਉਹ ਲਈ ਕੀ ਆਈਦਾ ਠੀਕ ਹੈ ਜੀ ਇਹ ਗਿਆਨ ਵਾਸਤੇ ਵੀ ਗੱਲ ਆ ਸਕਦੀ ਹੈ ਵੀ ਮੰਗਣ ਜਾਏ ਵੀ ਆਪਣੇ ਕੋਲ ਨਹੀਂ ਹੈ ਗਿਆਨ ਵਾਸਤੇ ਨਹੀਂ ਆ ਸਕਦਾ ਅਗਲੀ ਗੱਲ ਤੱਕ ਗਿਆਨ ਵਾਸਤੇ ਠੀਕ ਹੈ ਇਹ ਪੇਟ ਵਾਸਤੇ ਹੀ ਹੈ ਕਿ ਆਪਣੀ ਪੇਟ ਪੂਰਤੀ ਵਾਸਤੇ ਆਏ ਪੱਪੀ ਕਿ ਮੂਲ ਨਾਲ ਲੱਗੀਆਂ ਪਾ। ਉਹਦੇ ਪਿੱਛੇ ਨਹੀਂ ਲੱਗਣਾ ਚਾਹੀਦਾ। ਉਹ ਤਾਂ ਤੁਹਾਨੂੰ ਦੇ ਨਾਨਕ ਰਾਹ ਪਛਾਣੇ ਅਗਲੀ ਤੇ ਤੁਸੀਂ ਕਹੋ। ਚਾਹੇ ਤਾਂ ਆਤਮੂਹੇ ਦੇ ਲੈਵਲ ਤੇ ਕਾਰ ਖਾਏ ਜਾਏ ਸਰੀਰ ਦੇ ਲੈਵਲ ਤੇ ਕਾਰ ਖਾਏ ਜੀ ਦੇ ਲੈਵਲ ਤੇ ਵੀ ਆਪਣੀ ਦਸਤੂਰ ਨਾਲ ਦਿੱਕਤ ਆਪ ਕਰੇ ਤੇ ਦੂਜੇ ਨੂੰ ਦੇ ਕਛਤੂ ਦੇ ਸ਼ਬਦ ਵਿਚਾਰ ਕਰੇ ਆਪ ਖਾਵੇ ਸਮਝੇ ਆਪ ਸਮਝੇ ਤੇ ਦੂਜੇ ਨੂੰ ਸਮਝਾਵੇ ਜਾਣ ਕਰਾ ਉਹ ਰਾਫ ਪਛਾਣ ਸਕਦਾ ਜਿਹੜਾ ਉਤਮ ਕਰਦਾ ਰਹੇ ਰੋਜ਼ ਉੱਠ ਕੇ ਉਤਮ ਕਰੇ ਅੜਕੇ ਪਰ ਵਸਤੀ ਅਸ਼ਡੋਰ ਕਰੇ ਅਮਰਸਨ ਨਾਵੇ ਆਹੀ ਯਾਗ ਉਪਰਸਨ ਨਾਵੇ ਨਾ ਨਾ ਰੋਏ ਜਾਨੀ ਹੀ ਕਰੂਗਾ ਰਾਸ਼ਵਤੇ ਔਂਕਰ ਦਾ ਗੁਰਮਤਿ ਦਾ ਰਾਹ ਹੈ ਜੀ ਹਾਂ ਇਸ ਰਸਤਾ ਠੀਕ ਹੈ ਜੀ ਮਹੱਲਾ ਪਹਿਲਾ ਮਨੋ ਜੀ ਅੰਦੇ ਕੂਪ ਕਹਿਆ ਬਿਰਦ ਨਾ ਜਾਣਨੀ ਮਨ ਅੰਦਾ ਕਵਲ ਦਿਸਣ ਖਰੇਕ ਰੂਪ ਜੇ ਕੋਈ ਹੁੰਦਾ ਨਾ ਸਮਝ ਕੋਈ ਜਿਵੇਂ ਕੋਈ ਨੇ ਉਹ ਕੋਈ ਦਰਿਆ ਦੇ ਚਾਲੜੀ ਉਹ ਜੋ ਕੁਝ ਕਹਿ ਰਹੇ ਨੇ ਉਹ ਆਪਣੇ ਪਰਥਾਏ ਗੁਰ ਬਗੜੀ ਜੋ ਬੋਲ ਰਹੇ ਨੇ ਉਹ ਖੁਦ ਵੀ ਨਹੀਂ ਜਾਣਦੇ ਅਰਥ ਕੀ ਦੇ ਸਮਝ ਨਹੀਂ ਆਇਆ ਕੀ ਹੈ ਬੋਲ ਰਹੇ ਉਸ ਵੇਲੇ ਬੋਲ ਰਹੇ ਔਰ ਦੂਰੇ ਬਰਾਬਰ ਵੀ ਤਾਂ ਸ੍ਰੀ ਚੰਦ ਕੇ ਰਾਮ ਰਈਏ ਹੋਰ ਇਹ ਕਰੇ ਰਹੇ ਤੇ ਪ੍ਰਚਾਰੇ ਸੇ ਪਹੁੰਚਾ ਉਹਦਾ ਵਾਸਤੇ ਆ ਇਹ ਪ੍ਰਚਾਰ ਕਰ ਰਹੇ ਤੇ ਕਦੀ ਜਾਣਦੇ ਕਰ ਰਹੇ ਤੇ ਗੁਰੂ ਘਰ ਦੀ ਜਿਹਨੂੰ ਥਾਪਿਆ ਤਾਂ ਇਹਦੀ ਗੱਲ ਬਣੇ ਕਦੀ ਸੀ ਮੰਨਦੇ ਆਪਣੀ ਮਰਜ਼ੀ ਦੇ ਅਰਥ ਕਰਦੇ ਤੇ ਰਾਜ ਕਰੇਗਾ ਖਾਲਸਾ ਵਾਲੇ ਸੀ ਸਾਰੇ ਹਾਂ ਜੀ ਠੀਕ ਹੈ ਜੀ ਮਨ ਅੰਦਾ ਕਮਲ ਦਿਸਨ ਖਰੇ ਰੂਪ ਆ ਬੋਲ ਕਰਦੇ ਸੀਗੇ ਆ ਕਬਲ ਜਿਹੜੇ ਹਨਰੇ ਬੋਲ ਸੀਗੇ ਇਹ ਗੂਦੇ ਤੇ ਮਾਇਆ ਵਾਲੂ ਦੀ ਸੀ ਜਾਨ ਵੀ ਤਾਂ ਭੁੱਖੇ ਹੈ ਦੀ ਉਹ ਤੇ ਕਬਲ ਦਾ ਵੰਦ ਨਾ ਮਾਇਆ ਵਾਲੂ ਸੀ ਕਿਰਦਾ ਮਾਇਆ ਵਾਲੂ ਸੀ ਮਨ ਮਾਇਆ ਵਾਲੂ ਸੀ ਪਾਣ ਸੀਗਾ ਅੱਛਾ ਜੀ ਹਲ ਇਸਨ ਖਰੇ ਰੂਪ ਰੂਪ ਦੀਦੇ ਸੀ ਐ ਬਿਲਕੁਲ ਰੂਪ ਕੀ ਕੀ ਸਰੀਰ ਨੂੰ ਆਪਣਾ ਰੂਪ ਦੀ ਬਣਦੀ ਇਹ ਰੂਪ ਉਹ ਰੂਪ ਨੂੰ ਆਪਣਾ ਰੂਪ ਬਣਦੇ ਜੀ ਮਾਇਆ ਦੇ ਰੂਪ ਨੂੰ ਮਾਇਆ ਨਾਲ ਜੁੜੇ ਹੋਏ ਸੀ ਮਾਇਆ ਦਾ ਘੂਏ ਉਲਟੇ ਪਾਸੇ ਸੀ ਰੋਟੀਆਂ ਦਾ ਸਪੂਰਾ ਤਾਲ ਸੀ ਉਹ ਠੀਕ ਹੈ ਜੀ ਇੱਕ ਕਹਿ ਜਾਣ ਕਹਿਆ ਬੁੱਝੈ ਤੇ ਇੱਕ ਨਾਦ ਨਾ ਬੇਦਨਾ ਗੀਰਸ ਰਸ ਕਸ ਨਾ ਜਾਣੰਤ ਉਹ ਦੂਆ ਪਾਸਾ ਅਗਰ ਗੁਰਮਖਾੜਾ ਪਾਸਾ ਜਿਹਨੂੰ ਕਹਿ ਰਹਾ ਸੀ ਤੇ ਇਹਦੀ ਗੱਲ ਭੁੱਲਿਓ ਦੂਜੇ ਪਾਸੇ ਸੀਗਾ ਲੈਣੇ ਵਾਲੋਂ ਐ ਥੋਈ ਇਸ਼ਾਰਾ ਮੱਲੇ ਪਹਿਲੇ ਦਾ ਸ਼ਲੋਕ ਹੈ ਇੱਕ ਕਹੇ ਜਾਣੇ ਕਹਿਆ ਜੋ ਨਰਕਨੇ ਕਹਿ ਪਹਿਲਾਂ ਹੁਣ ਸੁਣਿਦੇ ਨੇ ਔਰ ਕਹਿ ਵੀ ਰਹੇ ਨੇ ਕੰਤਾ ਜਿਹੋ ਕਹਿਆ ਉਹ ਸੁਭਜ ਵੀ ਰਹੇ ਨੇ ਔਰ ਤੈ ਵੀ ਰਹੇ ਨੇ ਜਿਵੇਂ ਕੰਤਾ ਉਹ ਕਹਿਆ ਸੂਰਜ ਜਿਹੜੇ ਹਜ਼ਾਰ ਜੇ 10 ਵੀ ਰਹੇ ਨੇ ਹੈ ਬੁਝਿਆ ਨੇ ਕਹਾਇਆ ਸਮਝਦਾ ਨੇ ਫੈਲਾ ਜਿਹੜਾ ਕਹਿਆ ਉਹਨੂੰ ਬੁਝੇ ਵੀ ਲਿਆ ਹੋਇਆ ਨਵਾਂ ਵੀ ਕਹਿ ਰਹੇ ਨੇ ਤੇਰ ਸੁਗੜ ਰੂਪ ਉਹ ਦਾ ਸੁਗੜ ਰੂਪ ਨੇ ਇੱਕ ਨਾਲ ਨਾਲ ਦਾ ਬੇਦ ਧਗੀਆਂ ਇਕ ਨਾਦ ਨਾ ਦੇ ਗਾਦ ਪ੍ਰਗਟ ਅੰਦਰ ਨਾ ਧਿਆਨ ਹੈ ਉਹਨਾਂ ਦੇ ਕੋਲ ਨਾ ਉਹਨਾਂ ਦੇ ਅੰਦਰ ਅਗਿਆਸਾ ਗਿਆਨ ਤਾਂ ਬੇਦ ਹੈ ਰਦਾਂ ਦੀ ਹੈ ਇੱਕ ਨਾ ਬੇਦ ਨਾ ਗਿਆ ਰਸ ਕਸ ਨਾ ਜਾਣੰਤ ਅੱਧੀ ਰਸ ਜਾਂਦਾ ਹੈ ਸਹਣੀ ਰਸ ਨਾ ਜਾਣੋ ਤਾਂ ਦੇ ਵਿੱਚ ਫਰਕ ਨਹੀਂ ਜਾਣਦੇ ਜੋ ਸਾੜੀ ਆ ਜਿਗਲੇ ਕਰਦੇ ਨੇ ਉਹ ਲੋਕ ਦਾ ਰਸੇ ਬੁੱਧੀ ਜਾਂਦੇ ਨੇ। ਜੋ ਸਾਡੇ ਵਰਤਾਰੇ ਜਿਹੜਾ ਕਰਦੇ ਨੇ ਕਟਾ ਉਹਨੂੰ ਨਾਮ ਦਾ ਰਸੇ ਬੁੱਧੀ ਜਾਂਦੇ ਨੇ ਲੋਕ। ਜੋ ਕਥਾ ਕੀਤੀ ਖਾਸ ਉਹ ਰਸ ਕੀ ਹੁੰਦਾ। ਠੀਕ ਹੈ ਜੀ। ਇੱਕ ਨਾ ਸੁద్ధి ਨਾ ਬੁੱਧੀ ਨਾ ਅਕਲ ਸਰ। ਨਾਨਕ ਸੇ ਨਰ ਅਸਲ ਖਰ ਜੇ ਬਿਨ ਗੁਰ ਗਰਭ ਆਓ ਕੋਤਾ ਦਾ ਹਰੇ ਗੁਰ ਪਹਿਲਾਂ ਨਾ ਪਰ ਅਸਲ ਕੋਤੇ ਇਹਨੇ ਦੱਸਿਆ ਲਈ ਇਕਨਾਂ ਸੁਧ ਸੋਚੀ ਹੈ ਦੀ ਜਿਹੜੀ ਉਹ ਬੁੱਧ ਆ ਕਬੁੱਧ ਆ ਅਸਲ ਦੇ ਵਿੱਚ ਨੂੰ ਕੋਣ ਉੱਥੇ ਪਾਸੇ ਨੂੰ ਜਾਂਦੀ ਹੈ ਬੁੱਧ ਸਾਡੀ ਉਡੀ ਬੋਲਦੀ ਝੂਠ ਵਾਲੂ ਜਾਂਦੀ ਹੈ ਪਰ ਉਹ ਸਹੀ ਕਰਦੀ ਕੋਈ ਬਾਣੀ ਤੇ ਅਕਲ ਅਕਲ ਪਛਾਣ ਕਰਦੀ ਹੈ ਦੀ ਪਛਾਣ ਕਰਦੀ ਹੈ ਉਹ ਅਕਲ ਜਿਹੜੀ ਠੀਕ ਦੀ ਪਛਾਣ ਕਰੇ ਅੱਖਰ ਦਾ ਪਿਓ ਨਾਲ ਹੰਤ ਅੱਖਰ ਹੈ ਕਾਖਾ ਰੇ ਜੀ ਅੱਖਰ ਆਰ ਪੈੜ ਦੇ ਫਰਕ ਦੂਰੀ ਜਾਣ ਦੀ ਕਾਰ ਆਰ ਹੱਥ ਦੇ ਫਰਕ ਦੂਰੀ ਜਾਣ ਦੀ ਦੇ ਤਰ੍ਹਾਂ ਦੇ ਫਰਕ ਦੂਰੀ ਜਾਣ ਦੀ ਕਦੇ ਤੱਕ ਕੀ ਹੁੰਦਾ ਕਿ ਉਹ ਜਿੱਦ ਤਨੀ ਸਤਗੁਰੂ ਪੇਖਣ ਸਰਬੱਤ ਸੁਖਨਾ ਕੋ ਨੂੰ ਅੱਖਰਾਂ ਬਾਝੋਂ ਵੇਖਣਾ ਦਿਨ ਕੱਢੀ ਸੋਟਾ ਇਹ ਪੇਛਣੀ ਜਾਂਦੀ ਚੱਕਰ ਕਾ ਦੇ ਕੋਈ ਗੁਰੂ ਮਿਲ ਖੋਜੇ ਅੱਖਰਾਂ ਚ ਖੋਜ ਦੀ ਕਰ ਸਕਦੀ ਅੱਖਰਾਂ ਦਾ ਪੇਜ ਹੈ ਖੋਜ ਪੇਜ ਜਾਣਾਂ ਅੱਖਰਾਂ ਦਾ ਹੀ ਖੋਜ ਹੈ ਕਿ ਉਹ ਹਾਂਜੀ ਨਾਨਕ ਸੇਨਾ ਅਸਲ ਖਰ ਜੇ ਬਿਨ ਗੁਣ ਗਰਭ ਕਰਨ ਤ ਨਾਮਕ ਕਹਿੰਦਾ ਉਹ ਅਸਲੀ ਖੋਤੇ ਜੇ ਕਿਹਾ ਜੀ ਗੁਣ ਕੋਈ ਨਹੀਂ ਤਾਂ ਅਕਲ ਤੇ ਬੁੱਧੀ ਆ ਨਾ ਦਾ ਨੋ ਵਿਚਾਰ ਅੱਖਰ ਦਾ ਪਿਓ ਜਾਣਦੇ ਨੇ ਤੇ ਜਾਣਦੇ ਨੇ ਕੋਣ ਕੋਈ ਨਹੀਂ ਆਕੜ ਸਤਾਨ ਵਧੇਰਾ ਕਰ ਕਰਦੇ ਨੇ ਕੋਣ ਕੋਈ ਨਹੀਂ ਬਿਲਕੁਲ ਗਰਮ ਕਰਨ ਤਾਂ ਅਸਲੀ ਖੋਤੇ ਉਹਦੇ ਆਜਿਹੜੇ ਤੁਰੇ ਫਿਰਦੇ ਨੇ ਖੋਤੇ ਕਦੇ ਹਰਨਦੇ ਤਾਂ ਵਿਚਾਰੇ ਡਕਲੀ ਖੋਤੇ ਨੇ ਇਹ ਅਸਲੀ ਨਹੀਂ ਆਉਣੇ ਨਕਲੀ ਨੇ ਇਹ ਤਾਂ ਆਪਣਾ ਕੰਮ ਕਰਦੇ ਨੇ ਸਹੀ ਕੰਮ ਕਰਦੇ ਨੇ ਜਿਹੜੇ ਕੰਮ ਲੈ ਉਹੀ ਕਰਦੇ ਨੇ ਜਿਹੜੇ ਕੰਮ ਵਾਸਤੇ ਪਰਪੇਸ਼ਣ ਦੇ ਪਿੱਛੇ ਨੂੰ ਕੰਮ ਕਰਦੇ ਨੇ ਇਹ ਜਿਹੜੇ ਕੰਮ ਵਾਸਤੇ ਪਿੱਛੇ ਦੇ ਉਲਟਾ ਕਰਦੇ ਨੇ ਅਸਲੀ ਖੋਤੇ ਨੇ ਕੋਤਾਂ ਸੈਰ ਉਹ ਤਾਂ ਗੱਲ ਕਰੇ ਹਾਂਜੀ ਅਕਲ ਕੀ ਭਾਵ ਬਣਦਾ ਏ ਸਰ ਦਾ ਕੀ ਭਾਵ ਏ ਜਿੱਤਣ ਵਾਲੀ ਅਕਲ ਦੀ ਏ ਸਰ ਕਰਨ ਵਾਲੀ ਏ ਆ ਗੁਰਮੁਖ ਸਭ ਪਵਿੱਤ ਹੈ ਤਨ ਸੰਪੇ ਮਾਇਆ ਹਰ ਅਰਥ ਜੋ ਖਰਚ ਦੇ ਦੇਨ ਦੇ ਸੁਖ ਪਾਇਆ। ਗੁਰਮੁਖਾਂ ਨੇ ਸਭ ਕੁਝ ਇਹ ਤੋਂ ਬਿੱਤਰਾਂ ਕੀਤਾ ਹਨ ਸੰਪਤੀ ਮਾਇਆ ਸੋ ਤੋਂ ਬਿੱਤਰਿਆ ਜੋ ਦੇ ਜੋ ਹਰ ਦੇ ਅਰਥ ਹਰ ਦੇ ਪਰਥਾਏ ਜੋ ਖਰਚ ਕਰਦੇ ਨੇ। ਗੁਰਮੁਖ ਦੇ ਗਿਆਨ ਦੇ ਪਰਥਾਏ ਗਿਆਨ ਦੇ ਪ੍ਰਸਾਦ ਦੇ ਪਰਥਾਏ ਜੋ ਖਰਚ ਕਰਦੇ ਨੇ ਦਿਨ ਦੇ ਸੁਖ ਪਾਇਆ। ਤਾਂ ਤੇਰੇ ਆ ਦੇਖ ਦੇ ਨੇ ਲੱਗ ਕੇ ਲਉ ਸੋਖ ਬੋਗਦੇ ਤੁਕੀ ਹੁੰਦੇ ਖੁਸ਼ੀ ਹੁੰਦੀ ਅਰੂ ਖੁਸ਼ੀ ਮਿਲਦੀ ਹੈ ਜੀ ਹਾਂ ਬ੍ਰਹਮ ਗਿਆਨ ਘਰ ਠੀਕ ਹੈ ਜੀ ਇਹਦੇ ਪ੍ਰਚਾਰ ਖਰਚਾ ਹੋਰ ਕਿਸੇ ਚੀਜ਼ ਵਾਸਤੇ ਨਹੀਂ ਕਰਦੇ ਕਾਲਜ ਨਹੀਂ ਬਲੋੜੇ ਨੇ ਜਿਹੜੇ ਯੂਨੀਵਰਸਿਟੀ ਨੂੰ ਪੜਾਈ ਫਿਰਦੇ ਨੇ ਇਹ ਚੋ ਸੁਖ ਨਹੀਂ ਫੜਦਾ ਇਹਦੇ ਦੁੱਖ ਮਿਲੂਗਾ ਠੀਕ ਹੈ ਜੀ ਉਹ ਬਾਬਾ ਫਰੀਦ ਯੂਨੀਵਰਸਿਟੀ ਤਾਂ ਬਣਾਤੀ ਪਰ ਮਨ ਲੱਗਦਾ ਸਟੂਡੈਂਟਸ ਨੂੰ ਦੱਸਿਆ ਨਹੀਂ ਵੀ ਰੁੱਖੀ ਸੁੱਕੀ ਖਾਏ ਕੇ ਕਰਦੇ ਨੇ ਉਹ ਵੀ ਸਰਕਾਰ ਦੇ ਵੀ ਫਰਾਡ ਚੱਲਦਾ ਹੈ ਨਾ ਜੀ ਫਰਾਡ ਚੱਲਦਾ। ਪਰਚੀਆਂ ਵੀ ਉੱਥੇ ਵੀ ਹੈ। ਜੋ ਹਰ ਨਾਮ ਧਿਆਇ ਦੇ ਤਿੰਨ ਟੋਟ ਨਾ ਆਇਆ ਗੁਰਮੁਖ ਖਾਂ ਨਦਰੀ ਆਮਦਾ ਮਾਇਆ ਸੁਟ ਪਾਇਆ ਜੋ ਹਰ ਨਾਮ ਤੇ ਨਾਲ ਜੁੜਿਆ ਰਹਿੰਦਾ ਹੁਕਮ ਨਾਲ ਜੁੜਿਆ ਰਹਿੰਦਾ ਤੇ ਟੋਟ ਨਾ ਆਇਆ ਉਹਨੂੰ ਕਹਿੰਦੇ ਟੋਟਾ ਨਹੀਂ ਆਇਆ ਮਾਇਆ ਦਾ ਉਹਨਾਂ ਨੂੰ ਮਾਇਆ ਦਾ ਟੋਟਾ ਨਾ ਸੀ ਹੋਇਆ ਇਹ ਦੀ ਗੁਰਮੁਖ ਖਾਂ ਨਦਰੀ ਆਇਆ ਛੁੱਟ ਪਾਇਆ ਪ੍ਰਭੂ ਸਾਡੂ ਨਜ਼ਰਿਆਂ ਹੋਂਦ ਸਾਬਲੇ ਪਾਇਆ ਛੁੱਟ ਦਿੱਤੀ ਉਹਨਾਂ ਦੇ ਵਾਹਨ ਪਰੇ ਮਾਇਆ ਭਗਵਾਨ ਸੇਮਨ ਤਾ ਪ੍ਰਾਪਤੀ ਹੋਈ ਐ ਸਰੀਰ ਵੀ ਅਡਕਦਾ ਸਰੀਰ ਦੀ ਚਿੰਤਾ ਨਹੀਂ ਰੱਖੀ ਸਰੀਰ ਸੁਖ ਦਾ ਉਹਦੇ ਅਸਰੇ ਫਿਰ ਪ੍ਰਾਪਤੀ ਹੋਈ ਨਾਮ ਜੀ ਨਾਨਕ ਭਗਤਾਂ ਹੋਰ ਚਿਤਨਾ ਆਵਈ ਹਰ ਨਾਮ ਹੀ ਸਮਾਇਆ ਨਾਨਕਾ ਨਾ ਭਗਤਾਂ ਨੂੰ ਹੋਰ ਕੋ ਜਿਹੜੀਆਂ ਹੋਰ ਕੋਈ ਗੱਲ ਜਿਹੜੀ ਹੋਦੀ ਹਰ ਨਾਮ ਵਿੱਚ ਸਮਾਇਆ ਹਰ ਨਾਮ ਦੇ ਵਿੱਚ ਸਮਾਇ ਰਹਿਣਾ ਨੇ ਜਿਹੜੇ ਸਮਾਇਆ ਹੀ ਰਹਿੰਦਾ ਸੁਖ ਦੇਣ ਵਾਲੀ ਗੱਲ ਕੋਈ ਹੈ ਠੀਕ ਹੈ ਜੀ ਇੱਥੇ 22ਵੀਂ ਪੌੜੀ ਦੀ ਸਮਾਪਤੀ ਹੈ ਜੀ